ਹਾਂਜੀ ਅਗਲਾ ਜਿਹੜਾ ਅੱਖਰ ਹੈ ਜਿਹਦਾ ਉਪਦੇਸ਼ ਹੈ ਜੀ ਉਹ ਪੰਜਾਬੀ ਭਾਸ਼ਾ 'ਚ ਆਪਾਂ ਨੂੰ ਟੈਂਕਾ ਕਹਿੰਦੇ ਆ ਜੀ ਪਰ ਗੁਰਬਾਣੀ 'ਚ ਉਹਨੂੰ ਟਟਾ ਲਿਖਿਆ ਹੈ ਜੀ ਹੜਕ ਪਾ ਕੇ ਜਿਹੜਾ ਹਕਲਾ 'ਚ ਭਗਤ ਕਬੀਰ ਜੀ ਦਾ ਉਪਦੇਸ਼ ਹੈ ਜੀ ਟਟਾ ਵਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੀ ਨਾ ਜਾਹੀ ਬੜਾ ਮੁਸ਼ਕਲ ਘਾਟ ਆ ਉਹ ਲੱਭਦਾ ਨਹੀਂ ਕਿਸੇ ਨੂੰ ਘਾਟ ਉਹ ਘਾਟ ਹੁੰਦਾ ਕੋਈ ਦਰਿਆਨ ਪਾਰ ਕਰਨਾ ਹੋਵੇ ਕਿਸੇ ਘਾਟ ਸੇ ਹੀ ਕਾਰ ਹੁੰਦਾ ਜਿਹੜੀ ਕਲਪਨਾ ਜਿ ਮਰੀ ਹੈ ਨਾ ਇਹਨੂੰ ਬਤਾਰਦੀ ਨਦੀ ਕਹਿੰਦੇ ਸੇ ਤੂੰ ਇਹਦਾ ਘਾਟ ਇਹ ਘਾਟ ਬਤਾਰਦੀ ਨਦੀ ਕਾਰ ਕਰਦੀ ਹੈ ਸੱਪਰਲੇ ਪਾਸੇ ਜਿਹੜਾ ਇੱਕ ਦਰਵਾਜਾ ਹੋਰ ਕੇ ਚਲੇ ਜਾਈਦਾ ਫਿਰ ਘਾਟ ਘਟ ਬਾਹਨ ਇਰਦੇ ਵਿੱਚ ਇੱਕ ਬਿਗੜ ਘਾਟ ਹੈ ਜੇ ਤਾਂ ਫਿਰ ਬਿਚੇ ਜੇ ਪਾਰ ਕਰ ਜੀਏ ਫਿਰ ਅੱਗੇ ਦਰਵਾਜਾ ਅੰਦਰ ਚਲੇ ਜਾਈਦਾ ਉਹ ਕਿਉਂ ਨਹੀਂ ਜਾਂਦਾ ਤੂੰ ਉਹ ਕਹਿਣ ਦੇ ਤ੍ਰਿਕੁਟੀ ਦੇ ਵਿੱਚ ਜਿਹੜੀ ਕਲਪਨਾ ਚੱਲਦੀ ਹੈ ਉਹ ਛੱਡ ਕੇ ਥੱਲੇ ਆ ਜਾ ਵਿੱਚ ਜੇ ਕਿ ਜਿਵੇਂ ਜੇ ਤਰ ਹਾਜ਼ਰ ਹੋ ਜਾਣਾ ਜੇ ਜਾਗਦਾ ਉੱਥੇ ਆ ਜੀ ਤਾਂ ਹੈ ਹਿਰਦੇ ਜਾ ਸਕਦਾ ਕੰਢ ਤੋਂ ਥੱਲੇ ਉਹ ਕੰਢ ਚ ਮੰਦਰ ਜੋ ਕੀ ਕੰਢ ਤੋਂ ਇਹ ਮਨ ਦੇ ਵਿੱਚ ਹੈ ਮਹਿਲ ਹੈ ਨਾ ਮਨ ਤਾਂ ਮੰਦਰ ਹੈ ਨਾ ਉਹ ਕਹਿੰਦੇ ਘਾੜ ਬਾਹਰ ਦੀ ਜਿਹੜੇ ਬਾਹਰ ਦਰਿਆ ਦਾ ਕੇ ਗੰਗਾ ਦਾ अपने ਸਰੀਰ ਦੇ ਵਿੱਚ ਹੀ ਘਾਟ ਹੈ ਇਹ ਤੇ ਉਹ ਘਾਟ ਪਾਰ ਕਰਕੇ ਦਰਵਾਜਾ ਖੋਲ ਕੇ ਮਹਿਲ 'ਚ ਵੜ ਜਾਓ ਬੰਦੇ ਅੰਦਰ ਹੋਜੋ ਬੁੱਤਿਆਂ ਕਾ ਮੰਦੇ ਅੰਦਰ ਹੋਜ ਆਪਣੇ ਅੰਦਰ ਹੋਜ ਯਾਨੀ ਜਿੱਥੇ ਸਰੀਰਦਾਰ ਆਤਮਾ ਮੰਨ ਦਾ ਜੋੜ ਹੈ ਉਹ ਘਾਟ ਹੈ ਜੇ ਤਨਾ ਜੜ ਦਾ ਜਿਹੜਾ ਜੋੜ ਹੈ ਉਹ ਘਾਟ ਹੈ ਉਹਨੂੰ ਛੱਡ ਕੇ ਜਦ ਮਨ ਦੇ ਨਾਲ ਅਟੈਚਮੈਂਟ ਢੋ ਸਾਡੀ ਜਿਹੜੀ ਜੋਤ ਹੈ ਉਹਦੇ ਅੰਦਰੋਂ ਫਿਰ ਉਹ ਮਹਿਲ ਮਾਇਆ ਦਾ ਸਰੀਰ ਹੈ ਜਿਹੜਾ ਛੱਡ ਕੇ ਭੁੱਲ ਕੇ ਇਹਨਾਂ ਕਹਲੋ ਭੁੱਲ ਕੇ ਆਤਮਾ ਨਾਲ ਜੋੜ ਕੇ ਮਨ ਨੂੰ ਖੋਜ ਕੇ ਮਨ ਦੇ ਅੰਦਰੋਂ ਨਭਲ ਠੀਕ ਹੈ ਜੀ ਖੋਲ ਕਪਾਟ ਸਿਹਾਰੀ ਨਾਲ ਅਕੋਲੀ ਕਪਾਟ ਮਹਿਲ ਕੀ ਨਾ ਜਾਹੀ ਮਹਿਲ ਦੇ ਅੰਦਰ ਕਿਉਂ ਨੀ ਜਾਂਦਾ ਮਹਿਲ ਦੇ ਆਪਣੇ ਅੰਦਰ ਕਿਉਂ ਨਹੀਂ ਦੇਖਦਾ ਆਪਾਂ ਦੇ ਗੁਰਬਾਨ ਵਿੱਚ ਸੇਲੀਆਂ ਕਰਕੇ ਕਿਉਂ ਨਹੀਂ ਦੇਖਦਾ ਹਾਂ ਦੇਖੀ ਅਤਲ ਅਟਲ ਬੈਠਾ ਤੇਰਾ ਮੂਲ ਜਿਹੜਾ ਅਡੋਲ ਸਰੂਪ ਜਿਹੜਾ ਅਟਲ ਆ ਉਹ ਇੱਥੇ ਰਹਿੰਦਾ ਉਹਨੇ ਕਿਤੇ ਟਲਦਾ ਜਾਂਦਾ ਨਹੀਂ ਹੈ ਦੇਖ ਕੇ ਅਟਲ ਅਟਲ ਨੂੰ ਦੇਖ ਕੇ ਜਲ ਖਾਤੇ ਇਹਨਾਂ ਜਾਬਾ ਜੀ ਨੇ ਉਹ ਅਟਲ ਦੇਖ ਲਿਆ ਉਹ ਉੱਥੇ ਜੁੜ ਗਿਆ ਫਿਰ ਉਹ ਵੀ ਨਹੀਂ ਟਲ ਕੇ ਜਾਂਦਾ ਕਿਤੇ ਉਹ ਵੀ ਉੱਥੇ ਰਹਿ ਹੀ ਰਖ ਲੈਣ ਲੱਗ ਜਾਂਦਾ ਆਤਮ ਰਸ ਉਹਦੇ ਨਾਲੇ ਪਰਚ ਜਾਂਦਾ ਫਿਰ ਫੇਰ ਨਹੀਂ ਬਾਹਰ ਆਉਂਦਾ ਛੱਡ ਕੇ ਅੱਜ ਤੱਕ ਕੋਈ ਆਇਆ ਹੀ ਨਹੀਂ ਫਿਰ ਬਾਹਰ ਛੱਡ ਕੇ ਹੁਣ ਗੁਰਨਾਥ ਸਾਹਿਬ ਦਾ ਉਪਦੇਸ਼ ਹੈ ਜੀ 14ਵੀਂ ਪੌੜੀ ਦਾ ਆਸਾ ਮਹੱਲਾ ਪਹਿਲਾ ਪੱਟੀ ਚੋਂ ਟਟਾ ਤੰਚ ਕਰੋ ਕਿਆ ਪ੍ਰਾਣੀ ਘੜੀ ਕੀ ਮੋਹਰ ਕੇ ਉੱਠ ਚੱਲਣਾ ਅਗਲਾ ਸਾਹ ਹੋਣਾ ਕਿ ਨਹੀਂ ਹੋਣਾ ਇਹ ਤੁਸੀਂ ਲਾਪਰਵਾਹੀ ਦੀ ਕਰ ਸਕਦੇ ਪਤਾ ਨਹੀਂ ਹੈ ਬੋਲਤ ਕੋਈ ਨਹੀਂ ਹੈ ਤੁਹਾਨੂੰ ਜਦ ਉੱਠ ਚੱਲਣਾ ਪਊਗਾ ਕੋਈ ਬੋਲਤ ਨਹੀਂ ਇਕਦਮ ਹਾਰਟ ਅਟੈਕ ਹੋ ਜਾਂਦਾ ਰੂਹ ਆ ਸਾਭ ਨਹੀਂ ਅੱਛਾ ਤੰਚ ਦਾ ਪਾਪ ਕੀ ਹੈ ਜੀ ਇਹਦੇ ਵਿੱਚ ਲਾਪਰਵਾਹੀ ਕਰ ਲੋ ਕੋਈ ਕੁਝ ਹੈਸ਼ ਨਹੀਂ ਹੈਗੀ ਕੋਈ ਮੋੜ ਤਨਿਜਮ ਆਏਗੀ ਘੜੀ ਦੀ ਵੀ ਜੇ ਤੂੰ ਕਹੇ ਉਹ ਤਾਂ ਇੱਕ ਘੜੀ ਅੜਕ ਜਾਇਆ ਮਿੰਟ ਅੜਕ ਹੈਗੀ ਹਰ ਸ਼ਰਣਾ ਆਹ ਜੂਏ ਜਨਮ ਨਾ ਹਾਰੋ ਐਵੇਂ ਲਾਪਰਵਾਹੀ ਕਰਕੇ ਜਲਦੀ ਨਾਲ ਭੱਜ ਕੇ ਸ਼ਰਨ ਪਹੁੰਚ ਜਾਓ ਹਰ ਆਪਣੇ ਗੁਰ ਨਾਲ ਜੁੜ ਜਾਓ ਸਕਦਾ ਉਹਦੀ ਜਲਦੀ ਜੁੜ ਜਾਓ कोई पता नहीं अगला ਸਾਹ ਆਵੇ ਕਿਹਨਾ ਆਵੇ ਠੀਕ ਹੈ ਜੀ ਤੀਸਰੇ ਮਹੱਲੇ ਦੀ ਪੱਟੀ ਦਾ ਕੋਈ ਵਿਦੇਸ਼ ਨਹੀਂ ਹੈਗਾ ਜੀ ਟਟੇ ਅਖਰ ਦਾ ਹੁਣ ਹੈ ਜੀ ਵਾਵਨ ਅਖਰੀ ਮਹੱਲਾ ਪੰਜਵਾਂ ਪੌੜੀ ਤਹਿਲ ਕਰੋ ਤੋ ਏਕ ਕੀ ਜਾਤੈ ਬ੍ਰਿਥਾ ਨਾ ਕੋਈ ਮਨ ਤਨ ਮੁਖ ਹਿਏ ਬਸੈ ਜੋ ਚਾਹੂੰ ਸੋ ਆਪਣੇ ਬੂਲ ਦੀ ਕਹਿਲ ਕਰੋ ਜੇ ਬੂਲ ਨੂੰ ਸੰਜਿਆ ਤਾਂ ਪੱਤੇ ਗਾਂ ਭੂਲ ਲੱਗਣਗੇ ਬੂਲ ਦਾ ਨਾਲ ਸੇਵਾ ਨਾਲ ਹੀ ਉੱਪਰ ਫੜ ਬਿੰਦੇ ਨੇ ਪੱਤੇ ਕਾੜੀ ਸਾਰਾ درختਾਰਾ ਪ੍ਰਸਾਦ ਬੂਲ ਦੀ ਸੇਵਾ ਬੂਲ ਜੇ ਸਾਨੂੰ ਜੋ ਮਿਲਣ ਤਹਿਲ ਕਰੋ ਤੋਂ ਏਕ ਕੀ ਜਾਤੇ ਬ੍ਰਿਥਾ ਨਾ ਕੋਈ ਜਾਤੇ ਬ੍ਰਿਥਾ ਨਾ ਕੋਈ ਜੋ ਸਾਰਿਆਂ ਦੇ ਵਿੱਚ ਹੈ ਆਪਣੀ ਜਰਤੋ ਬ੍ਰਿਥਾ ਕੋਈ ਹੁੰਦਾ ਹੀ ਨਹੀਂ ਬੂਲ ਤੋਂ ਬਿਨਾ ਕੋਈ ਚੀਜ਼ ਹੁੰਦੀ ਉਹ ਦੀ ਫਾਇਦਾ ਬੂਲ ਹਰੇਕ ਚੀਜ਼ ਦਾ ਉਤੇ ਵਰਤਾ ਕੋਈ ਨਹੀਂ ਸਤਗੁਰ ਤੇ ਖਾਲੀ ਕੋਈ ਨਹੀਂ ਸਤਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਜਿਤਲਾਏ ਮਨ ਤਨ ਮੁਖ ਹਿਏ ਬਸੈ ਜੋ ਚਾਹੂ ਸੋ ਹੋਈ ਕਰਕੇ ਤਨ ਕਰਕੇ ਹਿਰਦੇ ਕਰਕੇ ਬਸ ਤਾਂ ਚਲੋ ਬਸਦਾ ਹੀ ਹੈ ਮਨ ਦੇ ਵਿੱਚ ਤਾਂ ਬਸਦਾ ਹੀ ਹੈ ਮੁਖ ਬਸੇ ਜੇ ਆਕੇ ਫਿਰ ਗੱਲ ਬਣ ਮੁਖ ਚ ਜਦ ਬਸਦਾ ਜਾਂ ਬੋਲਦਾ ਫਿਰ ਗੁਰਬਾਣੀ ਜਾਂ ਗੁਰ ਬੋਲਦਾ ਮੁਖ ਦੇ ਵਿੱਚ ਬਸਦਾ ਤਾਂ ਗੁਰਬਾਣੀ ਨਿਕਲਦੀ ਹੈ ਜੋ ਚਾਹੂੰ ਜੋ ਹੋਵੇ ਤੇ ਜੋ ਬੋਲਦਾ ਘਾਗੜਾ ਆਪਣੇ ਦਾ ਛੋਈ ਛੋਈ ਰਹਾ ਅੱਛਾ ਇਹ ਚਾਰ ਚੀਜ਼ਾਂ ਹਨ ਜੀ ਮਨ ਤਨ ਮੁਖ ਤੇ ਹਿਆ ਹਿਆਜ ਬਸਦਾ ਹੁੰਦੀ ਆ ਪਰ ਸਾਨੂੰ ਪਤਾ ਨਹੀਂ ਫਿਰ ਪ੍ਰਗਟ ਹੋ ਕੇ ਬਸਦਾ ਹੈ ਮਨ ਵਿੱਚ ਵੀ ਫਿਰਦੇ ਵਿੱਚ ਵੀ ਤਨ ਵਿੱਚ ਵੀ ਉਹੀ ਕਾਣਾ ਉਹੀ ਮਾਨਾ ਉਹੀ ਫਿਰਦਾ ਇੱਕੋ ਹੀ ਗੱਲ ਮੁਖ ਕੀ ਹੈ ਜੀ ਬੁੱਧੀ ਕਹਿੰਦੀ ਮੇਰੇ ਮੁਖ 'ਚ ਬਸਿਆ ਕੇ ਜੋ ਮੈਂ ਬੋਲਾਂ ਉਹ ਬੋਲੇ ਉਹਦੀ ਬਲਾਈ ਹੋਈ ਬੋਲਾਂ ਪਹਿਲਾਂ ਮੰਨ ਦੀ ਬਲਾਈ ਬੋਲਦੀ ਸੀ ਹੁਣ ਉਹਦੀ ਬੋਲੂ ਠੀਕ ਜੀ ਤਹਲ ਮਹਿਲ ਤਾਂ ਕੋ ਮਿਲੇ ਜਾ ਕੋ ਸਾਧ ਕਿਰਪਾਲ ਸਾਧੂ ਸੰਗਤ ਤੋਂ ਬਸੈ ਜੋ ਆਪਨ ਹੋਏ ਦਿਆਲ ਹਾਂ ਤਹਲ ਮਹਿਲ ਦੀ ਤਹਲ ਉਹਨੂੰ ਮਿਲਦੀ ਹੈ ਜਾ ਕੋ ਜੀ ਤੇ ਸਾਧ ਦੀ ਕਿਰਪਾ ਹੋ ਗਈ ਜਿਹਨੂੰ ਸਾਧ ਦੀ ਢੂਡ ਮਿਲ ਜਾ ਮਿਲ ਜਾ ਜਾਤੋ ਸਾਧ ਕਰਪਾਲ ਜੀ ਸਾਧੂ ਸੰਗਤ ਹੀ ਜੋ ਆਪਨ ਹੋਏ ਦਇਾਲ ਸਾਧੂ ਦੀ ਸੰਗਤ ਤੋਂ ਫਿਰੋ ਬਸਦਾ ਮੰਨ ਤੇ ਸ਼ਬਦਾਂ ਦੇ ਬਸਦਾ ਸ਼ਬਦ ਗੁਰੂ ਪ੍ਰਗਟ ਹੁੰਦਾ ਜੋ ਆਪਨ ਹੋਏ ਦਇਾਲ ਜੇ ਦਇਾਲ ਹੋ ਜਵੇ ਸਾਡੀ ਜਿਹੜੀ ਅਰਦਾਸ ਹੈ ਉਹ ਹੋਣ ਬਣ ਲਵੇ ਸਤ ਸੰਤੋਖ ਹੋਵੇ ਅਰਦਾਸ ਤਾਂ ਸਤਿਵਾਲੇ ਸਾਧ ਪਰ ਅਰਦਾਸ ਉਹ ਕਹਿੰਦੇ ਵੀ ਹੁਣ ਤਾਂ ਲਊਗਾ ਉਹ ਛੱਡ ਵੀ ਲਊਂਗਾ ਸਾੜ ਵੀ ਲਊ ਪਰ ਛੱਡ ਸੰਤੋਖ ਦੀ ਅਰਦਾਸ ਕਰਿਆ ਠੀਕ ਹੈ ਜੀ ਸਾਧੂ ਮੂਲ ਨੂੰ ਕਿਹਾ ਆਪਨ ਹੋਏ ਕੌਣ ਚਿੱਤ ਦੀ ਗੱਲ ਸਾਧੂ ਆਪੇ ਦਿਆਲ ਹੋ ਗਏ ਸਾਧੂ ਦਾ ਈ ਮਾਨ ਹੈ ਅੱਛਾ ਜੀ ਸਾਧੂ ਨੇ ਮੰਨ ਹੋਰ ਕਮ ਲਾਇਆ ਹੋਇਆ ਸਾਧੂ ਕਹਿੰਦੇ ਛੱਡ ਪਰਿਆ ਆ ਜਾ ਤੁਸੀਂ ਤੋਹੇ ਬਹੁ ਭਵਨ ਬਿਨ ਨਾਮੈ ਸੁਖ ਨਾਹੀ ਤਲੈ ਜਾਮ ਕੇ ਦੂਤ ਤਹਿ ਜੋ ਸਾਧੂ ਸੰਗੀ ਸਮਾਹੇ ਮੈਂ ਬਹੁਤ سارے ਭਵਨ ਜੋ ਉਟਾ ਕੇ ਦੇਖ ਲੇ ਬਹੁਤ سارے ਮੰਦਰਾਂ ਚ ਬਹੁਤ سارے ਆਦਮੀਆਂ ਮਿਲ ਕੇ ਆਦਮੀ ਟੋਲੇ ਸਾਰਿਆਂ ਨੂੰ ਪੁੱਛ ਲਿਆ ਕਹਿੰਦੇ ਨਾਮ ਤੋਂ ਬਿਨਾ ਸੁਖ ਨਹੀਂ ਸਾਰੇ ਇਹੀ ਕਹਿੰਦੇ ਨੇ ਨਾਮ ਤੋਂ ਬਿਨਾ ਸੁਖ ਨਹੀਂ ਸੋ ਉਹਨਾਂ ਕੋਲ ਵੀ ਹੈ ਨਹੀਂ ਸੀ ਨਾਮ ਹੈ ਨਹੀਂ ਸੀ ਉਹ ਕਹਿੰਦੇ ਭਾਈ ਨਾਮ ਤੋਂ ਬਿਨਾ ਸੁਖ ਨਹੀਂ ਅਸੀਂ ਵੀ ਬੈਠੇ ਹਾਂ ਸਿਰਫ਼ ਵਾਸਤੇ ਬੈਠਿਆ ਨਾਮ ਮੇੜੂ ਤਾਂ ਸੁਖ ਹੈ ਇਹ ਸੰਸਾਰੀ ਹਾਲ ਪਸੋਕਤਾ ਉਹ ਜਿਤ ਸੁਖ ਮੰਨਦੇ ਨੇ ਉਹ ਸੁਖ ਨਹੀਂ ਨਾਲ ਜਿਹੜਾ ਸੱਚਾਈ ਦਾ ਸਦਾ ਸੁਖ ਨਹੀਂ ਹੈਗਾ ਉਹ ਤਾਂ ਨਾਮ ਨਾਲ ਮਿਲਦਾ ਉਹ ਇਟਾ ਹੈ ਘੋ ਨਾ ਬਿਨਾਂ ਨਾਮ ਹੈ ਨਾਮ ਤੇ ਬਿਨਾ ਸੁਖ ਨਹੀਂ ਤਲੈ ਜਾਮਕੇ ਦੂਤ ਤੈ ਜੋ ਸਾਧੂ ਸੰਗੀ ਸਮਾਹੇ ਜਿਹੜੇ ਸਾਧੂ ਸੰਗ ਸਮਾ ਜਾਂਦੇ ਨੇ ਉਹ ਜਮਕੇ ਦੂਤ ਉਹਦੇ ਫਿਰ ਅੰਦਰੇ ਹੁੰਦੇ ਨੇ ਜਮਕੇ ਦੂਤ ਨਹੀਂ ਉਹ ਨੂੰ ਕੁਛ ਕਹਿ ਸਕਦੇ ਖਿਆਲ ਨਹੀਂ ਕਰਦੇ ਫਿਰ ਉਹਦਾ ਉਹਨਾਂ ਨੂੰ ਲੋੜ ਨਹੀਂ ਹੁੰਦੀ ਉਹਦੇ ਤੇ ਕੋਈ ਮਤਲਬ ਨਹੀਂ ਜਿੰਦਾ ਇਹ ਕੀ ਹੁੰਨੇ ਜੀ ਜਾਮਕੇ ਦੂਤ ਕੀ ਭਾਵੇਂ ਜੀ ਦੁਨੀਆ ਚ ਫਸਾਉਣ ਵਾਲੇ ਨੇ ਥਾਈ ਲੱਗੀ ਜਾਤ ਫੜ ਲੈ ਜਮਕੇ ਦੂਤ ਨੇ ਉਹ ਗੁਰਮੁਖ ਦੇ ਨੇੜੇ ਦੀ ਬਰੋਂ ਦੇ ਉਹ ਸਿੱਖਿਆ ਦੇਣ ਅੱਛਾ ਜੀ। 10 ਦੇ ਰੋਜ ਜਵਲੇ ਫਾਇਰ ਪਸਾਉਣ ਵਾਲੇ ਇਹਨੇ ਪੁੱਠੀ ਮਸਦ ਦੇਣ ਵਾਲੇ ਨੇ? ਠੀਕ ਹੈ ਜੀ। ਬਾਰ-ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਾਸੀ ਕੱਦਕੇ। ਬਾਰ-ਬਾਰ ਜਾਉ ਸੰਤ ਸਦਕੇ ਮੈਂ ਬਾਰ-ਬਾਰ ਸੰਤ ਦੇ ਕੁਰਬਾਨ ਜਾਵਾਂ। ਜਿਹਨੇ ਕੋਲੋਂ ਬਹੁਤ ਪੁਰਾਣੇ ਪਾਪ ਸੀ ਸਾਰੇ ਖਤਮ ਕਰਦੇ। ਕੋਦੋਂ ਨੇ ਜਦੋਂ ਦਾ ਰਾਮ ਘਰ ਵਿੱਚ ਆਇਆ ਉਦੋਂ ਦੇ ਪਾਪ ਜਿਹੜੇ ਪਿਛੇ ਤਾਂ ਪਿੱਛੇ ਪਏ ਹੋਏ ਨਹੀਂ ਸੀ ਹਟਦੇ ਸਾਰੇ ਨਾਸ਼ ਕਰਦੇ ਮਤਲਬ ਹੁਕਮ ਦਾ ਵਿਰੋਧ ਕਰਨ ਦੀ ਆਦਤ ਪਈ ਹੋਈ ਸੀ ਬਾਰੀ ਬਾਰੀ ਜਾऊं ਸਦਕੇ ਜਿਹੜਾ ਸਤਗੁਰ ਹੈ ਸੰਤ ਹੈ ਪਿੱਛੇ ਸਾਧੂ ਕਹਿਆ ਸੀ ਹੁਣ ਸੰਤ ਕਹਤਾ ਜੀ ਵਾਹ ਸੰਤ ਕਹਤਾ ਸਾਧਵੀ ਨੂੰ ਇਹ ਜੀ ਸਾ ਜਿਹੜਾ ਸਦਿਆ ਹੋਇਆ ਮਾਨਾ ਹੈ ਉਹ ਸਾਧਾ ਹੈ ਜੇ ਸੱਜ ਗਿਆ ਇਹੀ ਸਾਧ ਹੋ ਜਾਣਾ ਸੱਜ ਦੇ ਬਾਸ ਸਾਧ ਹੋਣਾ ਕਪੜੇ ਪਾਏ ਤੇ ਨਹੀਂ ਸਾਧ ਹੋਣਾ ਐਸੇ ਚ ਆਉਂਦਾ ਨੀ ਟਹਿਲ ਮਹਿਲ ਤਾਕੋ ਮਿਲੇ ਸਾਧੂ ਸੰਗਤ ਤੋਂ ਬਾਰ ਬਾਰ ਜਾਉ ਸੰਤ ਸੱਜ ਕੇ ਵਾਚਕ ਹੈ ਜੀ ਵਾਹ ਦੇ ਪ੍ਰਤੀਕ ਠੀਕ ਹੈ ਜੀ ਨਾਨਕ ਪਾਪ ਵਿਨਾਸ਼ੇ ਕਦ ਕੇ ਨਾਨਕ ਕਹਿੰਦਾ ਕਦ ਕੇ ਪਤਾ ਨਹੀਂ ਕਦੋਂ ਦੇ ਜਿੱਥੇ ਜਨਮ ਲਾਇਆ ਨੇ ਜੱਤੈ ਇਹ ਹੈ ਪਾਪ ਹੈ ਨਾਸ ਹੋ ਗਏ ਉਹਨੂੰ ਜਨਮ ਨਹੀਂ قانونی ਹੁਣ ਹੈ ਜੀ ਇੱਥੇ 27ਵੀਂ ਪੌੜੀ ਦਾ ਉਪਦੇਸ਼ ਸਮਾਪਤ ਹੈ ਜੀ ਤਾਂ ਆਪਾਂ ਖੋਲ ਕੇ ਕਪਾੜਾ ਅੰਦਰ ਵਰਜੋ ਠੀਕ ਹੈ ਜੀ ਮਨ ਨੂੰ ਕਿਹਾ ਵੀ ਜਾ ਕੇ ਉਹ ਜੇ ਕਪਾੜ ਖੋਲ ਕੇ ਅੰਦਰ ਵੜ ਜੇਗਾ ਤਾਂ ਫਿਰ ਇੱਕ ਹੋ ਜਾਏਗਾ ਹਾਂਜੀ ਕੇ ਦੂਤ ਗੱਲ ਕਰਦਾ ਨੇ ਸਿੱਖਿਆ ਦੇਣਾ ਕੇ ਨੇ ਉਦੋਂ ਚਾਲੂ ਹੁੰਦੇ ਨੇ ਨਾ ਪਰ ਇਹਨੂੰ ਠੀਕ ਹੈ ਇਹ ਕੰਮ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਇੱਕ ਵੀ ਖੜੀ ਦੀ ਤੁਹਾਨੂੰ ਵਿਲੰਭ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਫਿਰ ਜਨਮ ਜੁਏ ਚ ਹਾਰਿਆ ਜਾਓ ਭਰਾਂ ਦਾ ਜਮਕੇ ਦੁੱਧ ਫੜ ਲੈਣ ਕੇ ਅੰਦਰ ਵੜ ਜਾਓ ਜਮਕੇ ਦੁੱਧ ਫੜਦੇ ਦੀ ਠੀਕ ਹੈ ਜੀ ਕਿਉਂਕਿ ਦੁੱਧ ਤਾਂ ਕੀ ਪਤਾ ਕਿਹੜੇ ਵੇਲੇ ਆ ਜਾਣ ਲੈਣਾ ਜਿਹੜੀ ਪੁੱਠੀ ਮੱਤ ਚੜਦੀ ਆ ਪੁੱਠੀ ਮੱਤ ਠੀਕ ਹੈ ਜੀ ਪੁੱਠੀ ਮੱਤ ਚੜ੍ਹਨੀ ਸੀ ਉਹ ਕਵਾੜ ਖੋਲ ਕੇ ਅੰਦਰ ਚਲੇ ਜੂਵੇ ਉਹ ਸਾਰਾ ਚਾਣਨ ਹੋ ਜਾ ਤਾ ਉਹ ਨੂੰ ਦੇ ਦੂ ਇੱਥੇ ਟਟੇ ਦਾ ਉਪਦੇਸ਼ ਦੀ ਸਮਾਪਤੀ ਹੈ ਜੀ